ਸ਼ਲੋਕ ਮਹਲਾ ਤੀਜਾ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੇ ਸਤਗੁਰ ਭਾਵੈ ਸੋ ਮੰਨ ਲੈਣ ਸਹੀ ਕਰਮ ਕਰੇਨ ਜਿਹੜੇ ਪੁੱਤ ਸੁਪੁੱਤ ਹੁੰਦੇ ਨੇ ਨਾ ਚੰਗੇ ਪੁੱਤ ਹੁੰਦੇ ਨੇ ਜਿਹਨੂੰ ਪੁੱਤ ਕਹਿਣਾ ਚਾਹੀਏ ਉਹ ਬਾਬਾਣੀਆਂ ਕਹਾਣੀਆਂ ਪਿਓ ਦਾਦੇ ਦੀਆਂ ਕਹਾਣੀਆਂ ਕਰਦੇ ਹੁੰਦੇ ਨੇ ਰੋਜ਼ ਆਤਮਿਕ ਕਹਾਣੀਆਂ ਐ ਨਹੀਂ ਸੰਸਾਰ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਕਹਾਣੀਆਂ ਨੇ ਇਹ ਕਰਦਾ। ਬਾਬਾ ਕੌਣ ਹੈ? ਬਾਬਾ ਪਰਮੇਸ਼ਰ ਹੈ, ਪਿਓ ਹੈਗਾ ਜੀ ਕੋਈ ਪੈਦਾ ਹੋਇਆ ਹੈ ਉਹਦਾ ਮੂਲ ਹੈ। ਇਹ ਬਾਬਾਣੀ ਕਹਾਣੀ ਹੈ ਗੁਰਬਾਣੀ। ਇਹ ਰਾਜਾ ਰਾਮ ਦੀ ਕਹਾਣੀ ਬਾਬਾਣੀ ਕਹਾਣੀ ਹੈ। ਪੁੱਤ ਸੁਪੁੱਤ ਨੇ ਜਿਹੜੇ ਉਹਨਾਂ ਨੇ ਇਹ ਕੀਤੀ ਐ। ਜਿਹੜੀ ਚੰਦੂ ਸੁਪੁੱਤ ਨਹੀਂ ਸੀ ਉਹਨੇ ਨਹੀਂ ਕੀਤੀ। लक्ष्मी जी अंदर सुपुत्र नहीं थी नहीं कीती राम रैस सुपुत्र नहीं थी नहीं ਕੀਤੀ जेडे सुपुत्र सी ओना ने बाणिया कहानी आ दीतीया ने ओही कहानी ओही कथा अकट कथा आगे तो रही है जेडे सुपुत्र सी ओना ने ਸਤਗੁਰ ਨੂੰ ਜੋ ਚਾਹਦਾ ਹੁੰਦਾ ਸਤਗੁਰ ਦੇ ਬਾਣੇ ਨੂੰ ਉਹ ਮੰਨ ਲੈਂਦੇ ਨੇ ਜਿਹੜੇ ਸੁਪੁੱਤ-ਪੋਤਾਂ ਸਤਗੁਰ ਦਾ ਬਾਣਾ ਨਹੀਂ ਮੰਨਦੇ ਉਹ ਇਹ ਕਹਾਣੀ ਨਹੀਂ ਕਥਨ ਕਰ ਸਕਦੇ ਅੰਨੇ ਨੇ ਮੰਨ ਲਈ ਚੌਥੇ ਪਾਸ਼ਿਆ ਨੇ ਮੰਨ ਲਈ ਰੋਬਰਕਾਸ ਨੇ ਮੰਨ ਲਿਆ ਗੁਰਵੰਗਦ ਨੇ ਮੰਨ ਲਿਆ ਤਾਂ ਕਹਾਣੀ ਅੱਗੇ ਤੋਰੀ ਹੋਈ ਜਿਹੜਾ ਨੇ ਨਹੀਂ ਮੰਨੀ RAM Rai ਨੇ ਨਹੀਂ ਮੰਨੀ ਨਹੀਂ ਤੁਰ ਸਕੀ ਗੱਲ ਉਹਵੇਂ ਉਹ ਲਿਖਦੇ ਰਹੇ ਸਾਇਡ ਤੋਂ ਬੁਰਭਾਣੀ ਪਰੋਗਲ ਨਹੀਂ ਬਣੀ ਉਹਨਾਂ ਤੇ ਕਾਣੀ ਨਹੀਂ ਹੋ ਸਕੀ ਉਹ ਸੱਚ ਪ੍ਰਗਟ ਨਹੀਂ ਕਰ ਸਕਦੇ ਉਹ ਕਿਉਂਕਿ ਉਹਨਾਂ ਨੇ ਮੰਨਿਆ ਨਹੀਂ ਸੀ ਕਿ ਆਪਣੀ ਮਰਜ਼ੀ ਬਾੜ ਲਈ ਸੀ ਹਾਂਜੀ ਜੇ ਸਤਿਗੁਰੂ ਪਾਵੇ ਸੋ ਮੰਨ ਲੈਣ ਸੇਹੀ ਕਰਮ ਕਰਨ ਆ ਹਾਂਜੀ ਜਾ ਕੇ ਪੁੱਛੋ ਸਿਮਰਤ ਸਾਸਤ ਵਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ ਜਾ ਕੇ ਪੁੱਛ ਲੋ ਕਹਾਣੀਆਂ ਜਿਹੜੀਆਂ ਨੇ ਪਿਛਲੀਆਂ ਜਮਨ ਦੇ ਸਾਸਤ ਵਾਲਿਆਂ ਨੂੰ ਪੁੱਛ ਲੋ ਜਾ ਕੇ ਵਿਆਸ ਇੱਕੋ ਹੀ ਗੱਲ ਕਹਿੰਦੇ ਨੇ ਨਾਰਦ ਦੇ ਬਚਨ ਸੁਣ ਲੋ ਜਾ ਕੇ ਸਭ ਕਿ ਪਰੇਨ ਵਜਨ ਨਾਲ ਸਿਰਿਸ਼ਟ ਕਰੇਨ ਨਾਰਦ ਸਿ ਤੀਰੀ ਦਲ ਕਰਦਾ ਨਾਰਦ ਕਥਾ ਤੇ ਕਥਾ ਕਰਦਾ ਨਾਰਦ ਗੁਰਬਾਣੀ ਵੀ ਕਥਾ ਨਾਰਦ ਦੀ ਕਥਾਈ ਸਰੂਪ ਇਹੋ ਦਿਖਾਇਆ ਹੋਇਆ ਸੰਸਾਰ ਨੂੰ ਕਿ ਦੇ ਖਿਲਾਫ ਹੈ ਨਾਰਦ ਪੱਥਰ ਪੂਜਾ ਦੇ ਖਿਲਾਫ ਹੈ ਨਾਰਦ ਵਿਅਕਤੀ ਖਿਲਾਫ ਹੈ ਇਸ ਕਰਕੇ ਇਹਨਾਂ ਨੇ ਸਰੂਪ ਗੁਣਕਲੋਂ ਤੋਂ ਹੋਰੇ ਕੜੇ ਆਇਆ ਨਾਰਦ ਨਾਰਦ ਨੇ ਚੁਗਲ ਵੱਲ ਬਜੋ ਪੇਸ਼ ਕੀਤਾ ਹੈ ਹਾਂਜੀ ਠੀਕ ਹੈ ਜੀ ਇਹ ਗੁਣਵਾਚਕ ਨੌ ਹੈਗੇ ਜੀ ਬੇਆਸ ਜਿਨੀ ਆਸ ਮੁਕਗੀ ਹੋਵੇ ਹਾਂ ਗੁਣਵੰਤੇ ਡਿਗਰੀ ਦਾ ਨੌ ਜਿਹਨੇ ਵੇਦਾਂ ਦਾ ਸਾਰ ਜਾਣ ਲਿਆ ਉਹ ਬੇਦਵਿਆਸ ਹੈ ਜਿਹਨਾਂ ਆਪਾ ਗਿਆਨੀ ਕਹਿੰਦੇ ਨੇ ਜੀ ਸੁਖ ਕੌਣ ਸੀ ਜੀ ਪਤਨ ਸੁਆਮੀ ਸੀ ਸੀ ਇਹਨਾਂ ਨੇ ਸੀ hota ta hare ke paaya sukhdev swami hai oh brahmgyan de granth likhe ne oh na rad bachano vyas kehne sukh ko puchho jai sahi kavir ramaram chuto nahi tabude pai tenadi khwai hai gurvani ten brahmgyani ne aatma gyani ਸੱਚੇ ਪਾਸੇ ਜਿਹੜੇ ਸੱਚ ਨੇ ਲਾਟੇ ਹੋ ਲੱਗੇ ਹੋਏ ਨੇ ਸੱਚੇ ਆਪਣੀ ਮਰਜ਼ੀ ਨਾਲ ਕੋਈ ਨਹੀਂ ਲੱਗਦਾ ਜਿੱਦ ਤਰੋਂ ਕਰਤਾ ਪੁਰਖ ਉਹ ਉਹਦੇ ਲੱਗਦੇ ਨੇ ਬਾ ਜਿਹੜੇ ਸੱਚ ਨਾਲ ਜੁੜ ਕੇ ਸੱਚੀ ਕਾਰ ਕਰਦੇ ਕਰਦੇ ਸੱਚ ਵਿੱਚ ਹੀ ਸਮਾ ਜਾਂਦੇ ਨੇ ਸੱਚ ਨਾਲ ਜੁੜੇ ਰਹੇ ਨੇ ਸੱਚ ਦੀ ਕਾਰ ਕਰਦੇ ਨੇ ਸੱਚੇ ਸਮਾ ਜਾਂਦੇ ਨੇ ਹਾਂਜੀ ਨਾਨਕ ਆਏ ਸੇ ਪਰਵਾਣ ਭਏ ਸਗਲੇ ਕੁੱਲ ਤਾਰੈਨ ਦਾ ਨਾਨਕਾਂ ਦਾ ਜਨਮ ਲੈਣਾ ਦੇ ਪਰਵਾਣ ਹੁੰਦਾ ਹੈ ਜਿਹੜੇ ਸਾਰੇ ਗੁਰਾਂ ਨੂੰ ਹੀ ਉਪਦੇਸ਼ ਦੇ ਕੇ ਤਾਰਨ ਭਾਵੇਂ ਕੋਈ ਇਸਲਾਮ ਮੁਸਲਮਾਨਾਂ ਦੇ ਜਮੇ ਕੋਈ ਹਿੰਦੂਆਂ ਦੇ ਜਮੇ ਕੋਈ ਸਿੱਖਾਂ ਦੇ ਜਮੇ ਕੋਈ ਕਿਸੇ ਦੇ ਕੋਲ ਚ ਪੈਦਾ ਹੋਇਆ ਉਹਨਾਂ ਦਾ ਬਚਨ ਐਸਾ ਹੁੰਦਾ ਸਾਰਿਆਂ ਨੂੰ ਹੀ ਫਾਇਦਾ ਦੇਣ ਵਾਲਾ ਹੁੰਦਾ ਸਾਰਿਆਂ ਨੂੰ ਹੀ ਤਾਰਨ ਵਾਲਾ ਹੁੰਦਾ ਗੁਰਬਾਣੀ ਸਾਰਿਆਂ ਨੂੰ ਹੀ ਤਾਰਨ ਵਾਲੀ ਹੈ ਭਾਵੇਂ ਇਹਦੀ ਵਿਆਖਿਆ ਅਸੀਂ ਨਹੀਂ ਕਰ ਸਕਦੇ ਜਿਹੜਾ ਗੁਰਮੁਖ ਹੈ ਉਹਦਾ ਆਇਆ ਤਾਂ ਪਰਵਾਨ ਹੈ ਉਹ ਸਾਰੀਆਂ ਮਤਾਂ ਨੂੰ ਉਪਦੇਸ਼ ਕਰਦਾ ਗੁਰਬਾਣੀ ਦੀ ਸੋਝੀ ਰੱਖਦਾ ਉਹਨਾਂ ਨੂੰ ਸਵਾਲ ਸਕਦਾ ਹੋਵੇ ਉਹਨਾਂ ਨੂੰ ਸਿੱਧੇ ਚੰਗੇ ਰਸਤੇ ਦਾ ਆਉਣਾ ਪਰਵਾਨ ਹੈ ਹੁੰਦਾ ਹੈ ਮਤਮਤਾ ਸੰਤੋਖ ਪਿਤਾ ਅੱਛਾ ਜਿਹੜਾ ਉਸ ਮਤ ਦਾ ਗਿਆਨ ਹੈ ਉਹ ਬਾਪ ਹੈ ਉਸ ਜਿਹੜੀ ਮਤ ਹੈ ਉਹ ਮਾਂ ਹੈ ਅਲੱਗ-ਅਲੱਗ ਮਤਾਂ ਨੇ ਅਲੱਗ-ਅਲੱਗ ਖਾਨਦਾਨ ਬਣ ਗਏ ਕੁੱਲ ਬਣ ਗਏ ਜਿਵੇਂ मुसलमान कहावड़ मुचल हुए तो मुसलमान कहाए मुसलमान को भी उपदेश देता है मुसलमान औखा बढ़ना नहीं है मुसलमान को पैड़ी की नहीं है मगर मुसलमान लोग बढ़ नहीं रहे हां जी मोहल्ला गुरु जिना का अंधला सिख भी अंधे कर्म करें कोई भाणी चले अपने नित झूठो झूठ चूछ बोलें गुरु जिना का अंधला जना गुरु ही अज्ञानी है ਨਾਗਾ ਬਾਬਾ ਗੁਰੂ ਆਗੂ ਹੀ ਅਗਿਆਨੀ ਹੈ ਨਾ ਉਹ ਸਿੱਖੋ ਉਹਦੇ ਜਿਹੜੇ ਚੇਲੇ ਨੇ ਉਹ ਵੀ ਇੰਨੇ ਕਰਮਾਂ ਕਰਨਗੇ ਉਹਦੇ ਕਰਮਾਂ ਕਰਨਗੇ ਜਾਇ ਕਿ ਸਾਨੂੰ ਸਿੱਖਿਆ ਮਿਲ ਰਹੀ ਹੈ ਅੱਜ ਸਿੱਖਾਂ ਨੂੰ ਉਹ ਜੀ ਅਸੀਂ ਇੰਨੇ ਕਰਮ ਕਰਦੇ ਮੂਰਤੀ ਪੂਜਾ ਤਾਂ ਕਰਦੇ ਆ ਏਸੀ ਲਾ ਦੋ ਗੁਰੂ ਗ੍ਰੰਥ ਸਾਹਿਬ ਨੂੰ ਉਹ ਲਾ ਦੋ ਪੱਖੇ ਲਾ ਦੋ ਇਹ ਕਰ ਦੋ ਸਭ ਨੇ ਕੰਮ ਹੀ ਨਹੀਂ ਹੋਰ ਕੀ ਗੁਰਬਾਣੀ ਸਮਝੋ ਨਾ ਮੰਨੋ ਨਾ ਹੋਰ ਕੁਝ ਕਰੀ ਜਾਓ ਸਭੀ ਲੋਨ ਮੰਨਣ ਵਾਲਾ ਪਾਸਾ ਛੱਡ ਕੇ ਹੋ ਰਹੀ 52 ਗੱਲ ਦੇ ਔਖਾ ਹੈ ਨਾ ਮੰਨਣਾ ਔਖਾ ਹੈ ਔਖਾ ਕੰਮ ਛੱਡ ਕੇ ਉਸ ਪਾਸੇ ਨੂੰ ਅੰਦੇ ਕਰਮ ਕਰ ਸਿੱਖ ਵੀ ਅੰਦੇ ਕਰਮ ਕਰ ਰਹੇ ਨੇ ਜਲੂਸ ਕੱਢ ਲੋ ਕੀਰਤਨ ਦਰਬਾਰ ਕਰ ਲੋ ਬੰਦੋ ਕੁਝ ਹੋਇਆ ਹਾਂਜੀ ਓਏ ਪਾਣੀ ਚੱਲਣ ਆਪਣੇ ਨਿਰ ਝੂਠੋ ਝੂਠ ਬੋਲੇ ਨੇ ਚੱਲਣ ਆਪਣੇ ਆਪਣੇ ਗੁਰਕੇ ਪਾਣੇ ਦਾ ਕੋਈ ਚੱਲਦਾ ਹੀ ਨਹੀਂ ਗੁਰਬਾਣੀ ਕੀ ਕਹਿੰਦੀ ਇਹਦੀ ਤਾਂ ਪਰਵਾਹ ਕਿਸੇ ਨੂੰ ਆਪਣੇ ਪਾਣੇ ਮਰਜ਼ੀ ਅਨਸਾਰ ਚੱਲਦੇ ਨੇ ਨਾ ਝੂਠੇ ਝੂਠ ਹੋਰ ਬੋਲੀ ਜਾਂਦੇ ਨੇ ਝੂਠ ਤੇ ਝੂਠ ਬੋਲਦੇ ਜਾਂਦੇ ਨੇ ਝੂਠ ਤੇ ਝੂਠ ਬੋਲ ਜਾਂਦੇ ਨੇ ਉਹ ਫੇਰ ਵੀ ਝੂਠੇ ਰਹਿ ਜਾਂਦਾ ਸੱਚ ਬਣਦਾ ਹੀ ਨਹੀਂ ਝੂਠੀਆਂ ਸਾਖੀਆਂ ਬਣਾ ਬਣਾ ਕੇ ਝੂਠ ਬੋਲ ਬੋਲ ਕੇ ਕਈ ਕਈ ਬਣਾਤੀਆਂ ਝੂਠ ਦੀਆਂ ਹੈ ਸਭ ਝੂਠ ਇਹ ਸੰਸਾਰੀ ਗੁਰੂ ਦੀ ਗੱਲ ਕਹੀ ਹੈ ਗੁਰੂ ਜੀ ਨੇ ਕੰਦਲਾ ਸਾਰੇ ਗੁਰੂ ਨੇ ਸਾਰੇ ਮੇਰਾ ਸਾਡੇ ਗੁਰੂ ਤੇ ਹੈ ਕੌਣ ਮੇਰਾ ਗੁਰੂ ਅੱਖਰ ਨੇ ਸਾਡੇ ਕੋਲ ਗੁਰਬਾਣੀ ਦੇ ਇੱਡੀ ਬੰਦਾ ਕੋਈ ਨਹੀਂ ਮੇਰਾ ਨੇ ਹੁਣ ਲੱਗਦਾ ਅੱਖਰ ਨੇ ਹੁਣ ਸਾਡੇ ਕੋਲ ਇਹ ਬੁਲਾਉਂਦੇ ਨੇ ਅਸੀਂ ਬੋਲਦੇ ਆ ਇਹ ਹੋਇਆ ਜੋ ਬੋਲਿਆ ਉਹ ਕਿਹੜਾ ਅਸੀਂ ਮੰਨਦੇ ਆ ਉਹ ਕਿਹੜਾ ਚੰਗਾ ਲੱਗਦਾ ਸਾਨੂੰ ਹਾਂਜੀ ਕੂੜ ਕੁਸੱਤ ਕਮਾਉਂਦੇ ਪਰ ਸਦਾ ਕਰੇਨ ਓਏ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁੱਲ ਡੋਬੇ ਨੇ ਦੇਖ ਲੋ ਕੂੜ ਕੋਸੱਤ ਕਮਾਈ ਕਰਦੇ ਨੇ ਜਾਂ ਅਰਦਾਸ ਅਰਦਾਸ ਤੇ ਮੰਗਦੇ ਕੀ ਨੇ ਇੱਛਾ ਕੀ ਹੈ ਨਾ ਦੀ ਸਭ ਕੁਝ ਕਰਨ ਦੀ ਹਾਂਜੀ ਸਭ ਕਰਨ ਦੇ ਪਿੱਛੇ ਜੋ ਇੱਛਾ ਹੈ ਉਹ ਅਰਦਾਸ ਤੇ ਜਾਹਰ ਹੋ ਜਾਂਦੀ ਕੂੜ ਕੋਸੱਤ ਕਮਾਉਂਦੇ ਉਹ ਕਮਾਈ ਕਰਦੇ ਨੇ ਪਰ ਨਿੰਦਾਂ ਸਦਾ ਕਰਨ ਦੂਹੇ ਦੀ ਨਿੰਦਾਂ ਕਰਨੀ ਹੈ ਇਹ ਆ ਨੰਦਿਆ ਖਾਲਸਾ ਨੇ ਦੂਏ ਦੀ ਹੋਏ ਆਪ ਡੁੱਬੇ ਪਰ ਨੰਦਕਾ ਸਗਲੇ ਕੁੱਲ ਡੁੱਬੇ ਨੇ ਉਹ ਨੰਦਕ ਆਪ ਤਾਂ ਡੁੱਬਦੇ ਹੀ ਨੇ ਸਾਰੇ ਨਾਲਿਆਂ ਨੂੰ ਜਾਂਦੇ ਨੇ ਅਰਦਾਸਾਂ ਸੁਣਦੇ ਨੇ ਜਿੰਨੇ ਇਹਨਾਂ ਨਾਲ ਬੰਦੇ ਜੁੜੇ ਨੇ ਸਭ ਡੁੱਬ ਰਹੇ ਨੇ ਸਭ ਹੀ ਮਾਇਆ ਨਾਲ ਜੁੜ ਰਹੇ ਨੇ ਗੈਰੀ ਖੜਚ ਦਿਗ ਰਹੇ ਨੇ ਅਗਿਆਨਤਾ ਦੀ ਗੈਰੀ ਖੜਚ ਦਿਗ ਰਹੇ ਨੇ ਕੋਈ ਪਤਾ ਨਹੀਂ ਕੁਰਬਾਨੀ ਕੀ ਕਹਿੰਦੀ ਹੈ ਕੀ ਲੈਣਾ ਕੁਰਬਾਨੀ ਤੇ ਮਾਇਆ ਦੀਆਂ ਅਸਲਾ ਕਰਦੇ ਨੇ ਪ੍ਰੋਸਪਰਿਟੀ ਆ ਉਹ ਤੋਂ ਛੱਡ ਕੇ ਰਾਜ ਦੀਆਂ ਗੱਲਾਂ ਕਰਦੇ ਨੇ ਰਾਜ ਦੀਆਂ ਇਹ ਨਰਕ ਨੂੰ ਜ ਜਿੱਦ ਵੀ ਕੋਲ ਨੂੰ ਖੜੇ ਨੇ ਨਰਕਵਲ ਸਹ ਸਮਾਰੀ ਯਾਰੀ ਲਗਵੰਨੀ ਖੜੇ ਨੇ ਵੀ ਨਰਕਵਲ ਨੂੰ ਜਾਣ ਆ ਜਿਹੜਾ ਨਰਕਵਲ ਨੂੰ ਰੋਕ ਉਹਦੇ ਵਾਸਤੇ ਸਾਡੇ ਕੋਲ ਹਥਿਆਰ ਨੇ ਹਥਿਆਰ ਉਹਦੇ ਵਾਸਤੇ ਨੇ ਜਿਹੜਾ ਨਰਕਵਲ ਜਾਣ ਤੇ ਰੋਕਦਾ ਹੈ ਉਹਦੇ ਵਾਸਤੇ ਨੇ ਭਲੇ ਹਥਿਆਰ ਹਾਂਜੀ ਓਏ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁੱਲ ਡੁੱਬੇ ਨੇ ਆਪ ਦਾ ਡੁੱਬੇ ਦੇ ਸਾਰੇ ਕੋਲੋਂ ਡੁੱਬ ਰਹੇ ਨੇ ਹਾਂਜੀ ਨਾਨਕ ਜਿਤ ਉਹ ਲਾਏ ਤਿਤ ਲੱਗੇ ਓਏ ਬਪੜੇ ਕੀ ਕਰੇਨ ਉਹਨਾਂ ਕਹਿੰਦਾ ਜਿੱਦਾਂ ਜਿਤ ਲਾਏ ਨੇ ਉਹਨਾਂ ਦਾ ਜਿਹੜਾ ਇੱਛਾ ਹੈ ਜਿਹੜੀ ਅੰਦਰ ਦੇ ਦੀ ਇੱਛਾ ਹੈ ਮਾਇਆ ਦੀ ਭੁੱਖ ਜਾਗੀ है ਨਾਮ ਦੀ ਭੁੱਖ ਹੈ ਉਹ ਨਹੀਂ ਇਹਨਾਂ ਦੇ ਬਸ ਕੁਝ ਨਹੀਂ ਹੈ ਇਹਨਾਂ ਦੀ ਭੁੱਖ ਨੇ ਜਿੱਧਰ ਲਾਏ ਨੇ ਉਧਰ ਲੱਗੇ ਹੋਏ ਨੇ ਇਹਨਾਂ ਦੀ ਬੁੱਧੀ ਉਲਟੀ ਹੋਈ ਆ ਕਪੁੱਧ ਪੈਦਾ ਹੋ ਗਈ ਇਹਨਾਂ ਦੀ ਜਿੰਨੀ ਉਹਨੇ ਸੇਸੀ ਪੈਦਾ ਕੀਤੀ ਐ ਸਭ ਉਹਦੀ ਨਗਾ ਥੱਲੇ ਐ ਇਹ ਨਾ ਕੋਈ ਕਹਿ ਵੀ ਭੁੱਲ ਗਿਆ ਉਹ ਸਭ ਤੇ ਉਹਦੀ ਅੱਖ ਐ ਸਭ ਨੂੰ ਦੇਖ ਰਿਹਾ ਉਹ ਜੋ ਅਸੀਂ ਕਰਦੇ ਆ ਇੱਕ ਕੂੜ ਕੋ ਲਾਇਨ ਮਨਮੁਖ ਵਿਗੂਤੀ ਕਿ ਜਿਹੜਾ ਕੂੜ ਕੋ ਦੇ ਪਾਸੇ ਲੱਗੇਗਾ ਨਾ ਮਨਮੁਖ ਉਹ ਵਸ ਗਏ ਵਿਗੂਤੀ ਉਹਨਾਂ ਦੇ ਕੋਲੇ ਨਹੀਂ ਰਹਿਣਾ ਕੱਖ ਵੀ ਉਹਨਾਂ ਤੋਂ ਲੜ ਛੁੱਟ ਗਿਆ ਜਾਣ ਕੇ ਨਰਸਿ ਸਿੱਧਈ ਉਹ ਨਾਲਾ ਹੱਥ ਨਹੀਂ ਕਿਤੇ ਪੜਣਾ ਹਾਂਜੀ ਗੁਰਮੁਖੀ ਸਰਾ ਤੇ ਆਈ ਐ ਅੰਦਰ ਹਰ ਪ੍ਰੀਤੀ ਜਿਨ ਕੋ ਪੁੱਤ ਪੁੰਨ ਹੈ ਤਿੰਨ ਬਾਤ ਸੁਪੀਤੀ ਗੁਰਮਖਾਂ ਨੇ ਸਦਾ ਧਿਆਨ ਰੱਖਿਆ ਇਸ ਗੱਲ ਦਾ ਜਿਹੜੇ ਕੰਮ ਆਇਆ है. ਕਰਨਾ ਅੰਦਰ ਹਰ ਪ੍ਰੀਤੀ ਉਹਨਾਂ ਦੇ ਅੰਦਰ ਹਰ ਵਾਸਤੇ ਪ੍ਰੀਤ ਹੈ ਇਸ ਕਰਕੇ ਉਹਨਾਂ ਦਾ ਧਿਆਨ ਆਪਣੇ ਅੰਦਰ ਆਪਣੇ ਬੋਲ ਨਾਲ ਜੁੜਿਆ ਰਹਿੰਦਾ ਸੱਚ ਨਾਲ ਜੁੜਿਆ ਰਹਿੰਦਾ ਜਿੰਨ ਕੋ ਪੋਤੇ ਪੁੰਨ ਪੋਤੇ ਪੁੰਨ ਹੈ ਜਿਨ੍ਹਾਂ ਦੇ ਪੋਤੇ ਬਣ ਲੈਣ ਮਾਨ ਮਾਨ ਪੋਤਾ ਹੁੰਦਾ ਪੋਤਾ ਪਰਵਾਨ ਹਨ ਪੋਤਾ ਹੀ ਹੈ ਕਿਉਂ ਜਾਂਦੇ ਜੀ ਇਹ ਨੇ ਮਾਨ ਪੁੰਨੀ ਨੇ ਨਾ ਪੁੰਨ ਕਰਨ ਵਾਲੇ ਨੇ ਪਾਪ ਕਰਨ ਵਾਲੇ ਹੈ ਨਹੀਂ ਹੁਕਮ ਜੀ ਚੱਲਣ ਵਾਲੇ ਨੇ ਪੁੰਨ ਰੂਪ ਨੇ ਉਹ ਹੁਕਮ ਦੇ ਪਾਣੇ ਚੱਲਣ ਵਾਲੇ ਨੇ ਹੈ ਦਨਵਾਸ ਸੁਪੀਤੀ ਉਹਨਾਂ ਨੇ ਜਿਹੜੀ ਗੱਲ ਹੈ ਨਾ ਉਹਨਾਂ ਨੇ ਮਿੱਠੀ ਅੰਮ੍ਰਿਤ ਵਾਂਗੂ ਪੀਲੀ ਬਾਣੀ ਹੋ ਉਹਨਾਂ ਨੇ ਗੁਰਬਾਣੀ ਐ ਪੀਲੀ ਜਿਵੇਂ ਅੰਮ੍ਰਿਤ ਚੜ੍ਹਿਆ ਆਈ ਦਾ ਮਿੱਠਾ ਉਹਨਾਂ ਬਾਣੀ ਬਾਕੀ ਤਾਂ ਬਾਕੀ ਕੌੜੀ ਲੱਗਦੀ ਐ ਅੰਮ੍ਰਿਤ ਕੌੜਾ ਲੱਗਦਾ ਲੋਕਾਂ ਨੂੰ ਉਹਨਾਂ ਨੂੰ ਨਹੀਂ ਕੌੜਾ ਲੱਗਿਆ ਹਾਂਜੀ ਨਾਨਕ ਨਾਮ ਧਿਆਈ ਐ ਸੱਚ ਸਿਫਤ ਸੁਣਾਈ ਆਨ ਕਾ ਨਾਮ ਜੇ ਨਾਮ ਦੇ ਵਿੱਚ ਧਿਆਨ ਲਏ ਤਾਂ ਸੱਚੀ ਸਿਫਤ ਪਹਿਲਾਂ ਸੁਣ ਜਾਂਦੀ ਹੈ ਅੰਦਰੋਂ ਫਿਰ ਸੁਣਾ ਦੇਈਦੀ ਹੈ ਨੇ ਸੁਣਾਈ ਹੈ ਜਿਨ੍ਹਾਂ ਨੂੰ ਸੁਣੀ ਬਾਣੀ ਪਰ ਸੁਣ ਕੇ ਮੈਂ ਕਹੀ ਉਹਨਾਂ ਦਾ ਧਿਆਨ ਨਾਮ ਤੇ ਰਿਹਾ ਆਨ ਕਾ ਨਾਮ ਤੇ ਆਈਏ ਸੱਚ ਸਿਫਤ ਸੁਣ ਆਈ ਸੁਣ ਆਈ ਤੇ ਉਹਨਾਂ ਨੇ ਸੁਣਾਈ ਦੋ ਇਕੱਠੀਆਂ ਹੀ ਨੇ ਹਾਂਜੀ ਇੱਥੇ ਦਸਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ yeah.